ਜਿਸ ਕੋ ਹਰ ਪ੍ਰਭ ਮਾਨਜਿਤ ਆਵੇ ਸੋ ਸੰਤ ਸਹਿਲਾ ਨਹੀਂ ਡੁਲਾਵੇ ਜਿਸ ਕੋ ਹਰ ਪ੍ਰਭ ਉਸ ਚਿਤਤਾ ਦਾ ਜਿਹੜਾ ਹਰ ਪ੍ਰਭ ਉਸ ਚਿਤਤਾ ਜਵੇ ਉਹ ਨਹੀਂ ਡੋਲਦਾ ਉਹ ਡੋਲਦਾ ਨਹੀਂ ਹੈ ਫਿਰ ਹਰ ਪ੍ਰਭ ਮਾਨਜਿਤ ਆਵਾ ਸੋ ਇੱਕ ਮਾਨੇ ਹੋ ਗਏ ਮਾਨਜਿਤ ਠੇ ਨੇ ਮਨ ਵੀ ਆਵੇ ਚਿਤ ਜੀ ਵੀ ਆਵੇ ਪਠਾ ਵਿੱਚ ਜਿਤ ਦੇ ਵਿੱਚ ਨਹੀਂ ਰਹਿੰਦਾ ਵਾਂਚ ਨਹੀਂ ਰਹਿੰਦਾ ਹੈ ਜਿਤ ਦੇ ਵਿੱਚ ਤਾਂ ਚੱਗੀਆਂ ਹੁਣ ਉਹਦੇ ਉਹਦੇ ਰਹਿਣੇ ਚਾਹੁੰਦੇ ਰਹਿਣੇ ਕਈ ਗੱਲਾਂ ਚਾਹੁੰਦੇ ਹਾਂ ਵੀ ਕਰ ਸਕਦੇ ਚੱਗੀਆਂ ਹਾਲਾਤ ਇਹ ਨਹੀਂ ਹੁੰਦੇ ਬਾਹਰ ਚਾਹੁੰਦਾ ਕੁਝ ਕਰ ਸਕਦਾ ਹਾਲਾਤ ਦੀ ਉਸਨੇ ਸਭ ਇੱਕ ਕਈ ਬਿਧੂਰੀਆਂ ਹੁੰਦੀਆਂ ਨੇ। ਬਲੇ ਬੋਲ ਰਹਾ ਹਾਂ ਕਿ ਕਿਸੇ ਨੂੰ ਕੋਈ ਲਿਹਾਜ਼ ਨਹੀਂ ਬੋਲਦਾ। ਸਤਾਰਾਂ ਦਾ। ਹਾਂਜੀ। ਜਿਸ ਪ੍ਰਭ ਆਪਣਾ ਕਿਰਪਾ ਕਰੇ, ਸੋ ਸਹਿਜਕੋ ਕਿਸ ਤਰ੍ਹਾਂ ਡਰੇ। ਜਿਸ ਪ੍ਰਭ ਆਪਣਾ ਕਿਰਪਾ ਕਰੇ, ਪ੍ਰਭ ਆਪਣਾ ਕਿਰਪਾ ਕਰੇ, ਉਹਦਾ ਆਪਣਾ ਪ੍ਰਭ ਕਿਰਪਾ ਕਰੇ। ਉਹ ਦੂਆ ਨਹੀਂ ਕਰ ਸਕਦਾ। ਇਸ ਪ੍ਰਭ ਆਪਣਾ ਕਿਰਪਾ ਕਰੇ ਜੇ ਤੁਸੀਂ ਉਹਦਾ ਹੀ ਪ੍ਰਭ ਕਰੇ ਕਿਰਪਾ ਕਰੇ ਸੋ ਸੇਵਕੋ ਕੌ ਕਿਸਤੇ ਡਰੇ ਸੋ ਸੇਵਕੋ ਕੌ ਕਿਸਤੇ ਡਰੇ ਕਿਰਪਾ ਕਰੇ ਪ੍ਰਭ ਦੀ ਕਿਰਪਾ ਕਰੇ ਪ੍ਰਭ ਮਾਨ ਕਬੂਲ ਜੇ ਪ੍ਰਭ ਪ੍ਰਭਰਤ ਲੈਨੇ ਮਾਨ ਕਬੂਲ ਨਾ ਮਾਨਣ ਦੀ ਮਾਨ ਕਬੂਲ ਮਾੜਾ ਕਬੂਲ ਕਰਦੇ ਤੇ ਮਨ ਮਾਰੂਗਾ ਆਪਣਾ ਆਪਣਾ ਮਨ ਮਾਰਨਾ ਮਨ ਕਬੂਲ ਕਰਦਾ ਨਹੀਂ ਜਿਹੜਾ ਮਨ ਜਿਉਂਦਾ ਜਿਉਂਦੀ ਜਗਾ ਜਿਹੜਾ ਆਪਣਾ ਮਨ ਮਾਰਨਾ ਉਹੀ ਤਾਂ ਮਨ ਕਬੂਲ ਕਰਨਾ ਕਿਨੇ ਕਰਦਾ ਪ੍ਰਭ ਨੇ ਕਰਨਾ ਉਹ ਮਨ ਬਾਦ ਕਬੂਲ ਮਾੜਾ ਨਹੀਂ ਪ੍ਰਭ ਨੇ ਪ੍ਰਭ ਅਮਰ ਹੋਣੇ ਮਨ ਕਬੂਲ ਕਰਕੇ ਪ੍ਰਭ ਅਮਰ ਹੁੰਦਾ ਮਨ ਕਬੂਲ ਕਰਕੇ ਇਹ ਮਨਕੂਰ ਮਹਾਰਮਾਰਾ ਇਹਨ ਮਨਕੂਰ ਸ੍ਰੀਸ਼ਣ ਨਹੀਂ ਨਹੀਂ ਮਨ ਨੂੰ ਸਰੰਗ ਕਰ ਮਨ ਬੈਠਣਾ ਸਰਦੂਰ ਦੇ ਕੋਸ ਆਪਣੀ ਮਰਜ਼ੀ ਤੇ ਆਕਣਾ ਮਨਕੂਰ ਮਰਜ਼ੀ ਤੇ ਮਰਜ਼ੀ ਕਹਿੰਦੇ ਆ ਮੈਂ ਜਿਵੇਂ ਜਿਹੜਾ ਕਾ ਕਬੀਰ ਕਹਿੰਦਾ ਮਨ ਤਖੂਰ ਹੋਇਆ ਹੋਇਆ ਹਾਂ ਪਹਿਲਾ ਮਨ ਕਬੂਲ ਜੀ ਬਣ ਕੇ ਸਾਦਾਸ ਕਬੀਰ ਹੈ ਤੇ ਜਿਹਨੇ ਮਨ ਖੂਲ ਕਰ ਲਿਆ ਕਬੂਲ ਲਿਆ ਕਾਹ ਚ ਲੈ ਆ ਫਿਰ ਕਹਿੰਦਾ ਮਨ ਖੂਲ ਹੈ ਜੀ ਮੇਰਾ ਠੀਕ ਹੈ ਕਹਿੰਦਾ ਜੇ ਸੋਣ ਕੇ ਮਰਾਂ ਆਬ ਮਰਨ ਮਰਨ ਫਿਰ ਫਿਰ ਕਹਿੰਦਾ ਮਰ ਮਰ ਜਾਈਏਗੇ ਹਾਂ ਆਉਣੇ ਜਾਣੇ ਵੀ ਡੈ ਨਹੀਂ ਬਰਦਾ ਸਾ ਮਨਾ ਗੂੜਾ ਨਾਸ। ਮਾਰਨਾ ਦਾ ਆਪਣਾ ਮਾਨ ਹੈ। ਮਾਰਨਾ ਮਨੇ ਆ। ਐਛਾ ਮੈਂ ਮਾਲਦੀ ਹਾਂ ਆਪਣੇ ਘਰੋਂ। ਰਿਕਾਰਡਿੰਗ ਦੇ ਪਿੱਛੇ ਮਰਨ ਸਰੀਰ ਤੇ ਸਰੀਰ ਦੀ ਉਹ ਵੀ ਮਰਨ ਚਾਹੁੰਦੀ ਹੈ। ਜਿਵੇਂ ਕੰਨ ਕੋਈ ਭਾਇ ਜਿਵੇਂ ਕਵੀਰ ਸਾਹਿਬ ਦੱਸਿਆ ਗਿਆ ਜਾਨ ਸਰੀਰ ਜਾਨ ਦੀ ਕੋਈ ਜਿਹੜਾ ਮਨ ਕਬੂਲ ਹੈ ਸਾਰੀ ਰਫਜ਼ਾ ਕੋਈ। ਗੁਰਬਾਨ ਦਾ ਮਾਰਨਾ ਹੈ ਕਿ ਜਰਮਾਣਾ ਕਿਸ ਮਾਰੇ ਜਾਂਦੀ ਫਿਰ ਇਹ ਲਫ਼ਜ਼ ਸੰਸਾਰੀ ਭਾਸ਼ਾ ਦਾ ਮਾਰਨਾ ਪਰ ਇਹ ਦੋ ਇਸ਼ਾਰਾ ਪੜਦੇ ਹਨ ਕਿ ਸਰੀਰਕ ਤੌਰ ਤੇ ਤਾਂ ਇਹਨਾਂ ਸਪਾਸ਼ਾਣ ਚਲਵਾਰ ਕੱਢੀ ਮਟਕੂੜ ਚੇਰੇ ਕੱਢੀਏ ਫਿਰ ਸਰੀਰਕ ਤੌਰ ਤੇ ਵੀ ਮੰਨਿਆ ਹੈ ਪਰ ਤੌਰ ਤੇ ਵੀ ਹੁੰਦਾ ਦੇ ਜੀ ਦਾਲ ਤੇ ਮੰਨ ਨਾ ਕਬੂਲ ਨਹੀਂ ਸ੍ਰੀ ਗੰਦਰ ਮੰਨ ਕਬੂਲਿਆ ਭਗਤਾ ਦੇ ਸਾਰਿਆਂ ਨੇ ਕਬੂਲਿਆ ਕਿ ਤਾਂ ਹੀ ਤਾਂ ਤਾਂ ਹੀ ਹੈ ਤਾਂ ਤੋਂ ਮਾਸਿਕ ਨਹੀਂ ਹੋ ਰਾਜੇ ਜੇ ਕਹਿਣਾ ਨਾ ਵੀ ਦੂਏ ਨਾ ਛੱਡਦੇ ਉਹ ਕਹਿਣਾ ਨਹੀਂ ਛੱਡਦੇ ਫਿਰ ਮਨ ਖੋਲਿਆ ਜੀ ਇਹ ਗੱਲ ਸੀ ਸੰਸਾਰੀ ਮੜਨਾ ਹੀ ਸੀ ਉਹਨਾਂ ਕੋਈ ਲੋਕਾਂ ਦਾ ਸੰਸਾਰੀ ਮਾਣ ਇਹਨਾਂ ਨੂੰ ਜਾਣਦੇ ਨੇ ਕੋਕੀ ਉਹ ਅਸਲ ਚ ਆਪਣਾ ਮਾਣ ਮਾਰੇ ਤੇ ਨਾ ਮਾਣਕ ਬੂਣ ਹੁੰਦਾ ਹੀ ਨਹੀਂ ਕਹਿਣਾ ਮਤਲਬ ਇਹ ਕਿ ਜਿੰਨਾ ਜਲ ਮਾਣੇ ਮਾਰੇ ਉਹ ਮਾਣਕ ਨਹੀਂ ਹੁੰਦਾ ਹੈ ਅੱਜ ਉਹ ਬਾਜ ਤੋਂ ਨਾਲ ਪਹਿਲਾਂ ਮਰਦਾ ਇਹ ਗੱਲ ਗਲਤ ਹੈ ਵੀ ਪਹਿਲਾਂ ਮਾਣ ਚਿੱਤਕੂਲ ਕਰੇ ਬਾਜ ਤੋਂ ਮਾਣ ਉਹ ਮਾਣ ਨਹੀਂ ਦਾ ਮਾਣ ਜਿੱਦਾਂ ਗੂਣ ਕਰੇ ਕਾ ਜੁਨਾ ਜਰਮਾਨੀ ਬਣਦਾ ਉਹਦਾ پہلا manne manna manne samjheva ode taahi kripa te hi hoye athhe jis prab apna kripa kare aa kripa kare apne mannu bana love pehla tu sikh ko pau kis se kare phir ਫਿਰ ਬੁੱਧੀ ਨਹੀਂ ਦਲਦੀ ਹੈ ਬੋਲਣ ਲੱਗੀ ਸਹਿਬ ਨੂੰ ਬੁੱਧੀ ਦਰਵਾਇਆ ਤੇ ਫਿਰ ਬੁੱਧੀ ਨਹੀਂ ਦਲਦੀ ਉਹ ਜਿਵੇਂ ਮੋਟਾ ਮਾਰ ਨਹੀਂ ਦਿੰਦੀ ਕਿਹਦਾ ਲਾ ਫਿਰ ਉਹਦਾ ਬੁਰਗ ਬੋਲਿਆ ਹੈ ਪ੍ਰਭਾ ਦਾ ਉਹ ਨੂੰ ਡਰਦੀ ਜਾ ਰਹੀ ਫਿਰ ਆਹ ਲਾ ਆਪਣਾ ਯਾਦ ਪ੍ਰਭ ਮਾਲਕ ਕੋਲ ਖੂਰ ਕੇ ਖੜਾ ਅੰਦਰ ਅੰਤਰਾਤ ਕੋ ਫਿਰ ਬੁੱਧ ਬੋਲਣ ਲੱਗੀ ਆ ਬਬੇ ਬੋਲਣ ਦਾ ਨਹੀਂ ਲਾਇਕ ਕਰਦਾ फेर भुली जाती है क्या कर की जाती है मैं चुप करके कर बैठा रहे अपने हालमोंले फेर लेवे सारे उठे मिल जाती है हमारा फेर नाल असर दिमाग रो तो डर गया शरीर तो लॉस या शरीर टच दर्द हां ऐसे करके डर शरीर के कष्टे तो जो टॉर्चर तो या उनके शरीर जान तो डर बस इधर हां जी ਜੈਸਾ ਸਾ ਤੈਸਾ ਦ੍ਰਿਸ਼ਤਾ ਆਪਨੇ ਕਾਰਜ ਮੈਂ ਆਪ ਸਮਾਇਆ ਜੈਸਾ ਸਾ ਜੈਸਾ ਸਾ ਤੈਸਾ ਦ੍ਰਿਸ਼ਤਾ ਆਇਆ ਤੈਸਾ ਦ੍ਰਿਸ਼ਟੀ ਆਇਆ ਜੈਸਾ ਕੁਝ ਥਾ ਉਸਾ ਕੁਝ ਦਰਸ਼ਨ ਕਰਾਤਾ ਦਿਖਾਤਾ ਦ੍ਰਿਸ਼ਟੀ ਐਸੇ ਆਇਆ ਦਿਖਾਤਾ ਦੇਖ ਲਿਆ ਦਰਸ਼ਨ ਹੋ ਗਿਆ ਆਪਣੇ ਕਾਰਜ ਮੈਂ ਆਪ ਸਮਾਇਆ ਬਸ ਪ੍ਰੇਨਾ ਦਾ ਜੈਸਾ ਸਾ ਹੁਕਮ ਹੈ ਜੈਸਾ ਹੁਕਮ ਹੈ ਹਕਮ ਹੈ ਉਹ ਸਾ ਦੇਖ ਲਿਆ ਜੋ ਕੁਝ ਹੋ ਰਿਹਾ ਸਾਰਾ ਕੌਣ ਕਰ ਰਿਹਾ ਕੌਣ ਮਰ ਰਿਹਾ ਕੌਣ ਮਰ ਰਿਹਾ ਇਹਦੇ ਹੁਕਮ ਨਾਲ ਕੀ ਹੋਇਆ ਇਹ ਇਹ ਸਮਝ ਲਿਆ ਸਮਝ ਲਿਆ ਇਹਨਾਂ ਜਨਤਾ ਕੇ ਪਾਸ ਕੋਛ ਨਹੀਂ ਆ ਸਮਝਦੇ ਫਿਰ ਡਰੇ ਕੀ ਤੇ ਸੋ ਸਿਰ ਕੋ ਕਿਸੇ ਡਰਿਆ ਕਿਉਂ ਜਿਹਾ ਸਾ ਸਾ ਜੋ ਕੁਝ ਬਰਨਬਰ ਹੋ ਰਿਹਾ ਉਹਦਾ ਦੇਖਿਆ ਉਹਦੇ ਰਹੀ ਤੇ ਜਿਹਾ ਸਤੂ ਗੁੰਗਲ ਉਹਦਾ ਤੇ ਘਰੇ ਆ ਵੀ ਆਪਣਾ ਬਣ ਕੇ ਹੋ ਰਿਹਾ ਕੋਣ ਕਹ ਲੈ ਉਹ ਕਾਦੇ ਰਹਿਣਾ ਤੇ ਆ ਗਰਨੇ ਜੋ ਕੁਝ ਹਕੀਕਤ ਹੈ ਜਪਣ ਬਣ ਪਿੱਛੇ ਨੁਕਸਾਨ ਪਿੱਛੇ ਦੇਖ ਲਾਭ ਪਿੱਛੇ ਜਿਹਾ ਜਸ ਜਿਹਾ ਪਿੱਛੇ ਜੋ ਹਕੀਕਤ ਹੈ ਉਹਦਾ ਦਾ ਸਮਝਿਆ ਕੀ ਉਹ ਤਾਂ ਦਸ਼ਮਾਨ ਹੈ ਕੋਈ ਇਹਨਾਂ ਦੇ ਘਾਤੇ ਰਹਿਦੇ ਦੁਹਾਂ ਸੇ ਇਹਨੇ ਬੱਲੇ ਕੀ ਹੈ ਇਹ ਤਾਂ ਕੁਝ ਵੀ ਨਹੀਂ ਕਰ ਸਕਦੇ ਕੋਈ ਵੀ ਨਹੀਂ ਕੁਝ ਕਰ ਸਕਦਾ ਉਹ ਉਹਨੇ ਬਨਾਤਾ ਉਹ ਉਹਦਾ ਦਿਖ ਰਿਹਾ ਸੁਣਿਆ ਹੋਇਆ ਨਹੀਂ ਹੁਣ ਉਹ ਦਸ਼ਮਾਨ ਹੈ ਉਹਨੂੰ ਉਹਦੇ ਉਹ ਦਸ਼ਮਾਨ ਹੈ ਜੇ ਜਦ ਦਸ਼ਮਾਨ ਹੋ ਗਿਆ ਫੇਡਲਣਾ ਕਿਸ ਤਰ੍ਹਾਂ ਹੋ ਜਾਏ ਹੈ ਗੈਰ ਹੈ ਏ ਆਸਪਤਲ ਲਈ ਚੱਕੇ ਤੱਕ ਦੀ ਦਵੀ ਦਾ ਕਰ ਹੂੰ ਆਈ ਰ ਤਤੀ ਤਬੀ ਤੱਕ ਲਈ ਇਹ ਗੱਲਾਂ ਚੱਕੇ ਇਹ ਤਾਂ ਹੈ ਰਾਜੇ ਦਾ ਖਰਾਬ ਵੀ حکومت ਦਾ ਵੀ ਸਾਬਿਤ ਹੈ ਨਾਲੇ ਬਿਆਨ ਕੀਤੇ ਉਸਾਰ ਵੀ ਜਣਾ ਪੈ ਗਿਆ ਲੋਕ ਕਾਇਸ ਅਲੈਕੀਓ ਕਰ ਦੇ ਦੇ ਆ ਜੈਸਾ ਸਾ ਤੈਸਾ ਦਿਸਦਾ ਆ ਆਪਣੇ ਕਾਰਜ ਮੈਂ ਆਪ ਸਮਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਕਾਰਜ ਆ ਪਰਮੇਸ਼ਰ ਦਾ ਕਾਰਜਾ ਸਿਰਸਤੀ ਉਹ ਆਪ ਇਹਦੇ ਵਿੱਚ ਆ ਪਿੱਛੇ ਹੁਕਮ ਦੇ ਵਿੱਚ ਹਾਕਮ ਆਪੇ ਹੈ ਵਿਚ ਗੁਦਰਤ ਹਰ ਪ੍ਰਭ ਬਸੇ ਸੇਗੀ ਬਸੇ ਹੀ ਆ ਆਪੇ ਸਮਾਇਆ ਹੈ ਕਾਇਦ ਦਿੱਤੀ ਇਹ ਉਹ ਦਸ਼ਮਾਨ ਹੋ ਗਿਆ ਜਿਹੜਾ ਕਾਰਜ ਜਿਹੜਾ ਜਮਾਵਨਾ ਉਹ ਦੋੜਦੇ ਹथे ਜਿਹੜਾ ਵਿੱਚ ਸਮਾਇਆ ਹੋਇਆ ਇਹ ਆਮਿਆ ਫਿਰ ਫਿਰ ਤਨੇ ਦੂਏ ਉਹ ਨਹੀਂ ਦਦਾ ਇਹ ਗੱਲ ਸਹੀ ਅਰੇ ਇਹ ਵੀ ਪਤਾ ਕਿ ਹੋਣਾ ਹੈ ਇਹ ਪਹਿਲਾਂ ਹੀ ਪਤਾ ਸੀ ਇਹਦੀ ਪਤਾ ਨਹੀਂ ਸੀਗਾ ਆਕਰ ਮੁਸਲਮਾਨ ਨੂੰ ਕੁਝ ਪਤਾ ਕਰਨਾ ਹੁੰਦਾ ਅਹਿਆਨ ਬਣਨ ਤੇ ਕੁਛ ਨਹੀਂ ਕਿਹਾ ਸੱਚ ਤਾਂ ਤੇ ਹਰ ਜਾਣ ਕੇ ਕਿਹਾ ਹਜਰ ਕੁਛ ਵੀ ਹੋ ਅਸੀਂ ਜਾਣ ਕੇ ਕਿਹਾ ਵੀ ਗੁਰਾਈ ਦੀ ਤੇ ਕਿਹਾ ਅਸੀਂ ਜਾਣਾ ਨਹੀਂ ਕਿਹਾ ਕਰਨੇ ਪੜਨਾ ਸੀ ਤੁਂ ਚੁੜਦਾ ਸਾਰਾ ਪਾਜਤੀ ਸੀ ਕੁੜਦਾ ਊੜੋਟ ਚੁੜਦਾ ਬਚ ਕਰਨ ਵਾਸਤੇ ਉਹ ਗੱਲ ਮੰਨਣੀ ਪੈਣੀ ਸੱਚਾ ਹੋ ਸੱਚ ਨੂੰ ਕਿਹ ਬਣਾ ਮਹਨ ਸੱਚ ਲੋਕੀ ਸੱਚਾ ਸਾਰਾ ਜੋਰ ਤਾਂ ਐਸੇ ਗੱਲ ਤੇ ਹੈ ਗੁਰਬਾਨ ਦੇ ਦੀ ਵਿਚਾਲੇ ਕੋਈ ਹੈ ਨਹੀਂ ਗੁਰੂ ਹੁੰਦਾ ਹੀ ਨਹੀਂ ਤੁਸੀਂ ਐਸੀ ਗੱਲ ਨੂੰ ਬਣਾ ਲਓ ਜੋੜ ਦੋ ਉੱਥੇ ਰਹਿ ਗਿਆ ਫਿਰ ਜੋੜ ਬਰਦਾਸ਼ਤ ਨਹੀਂ ਕੋਈ ਕੰਪਰੋਮਾਈਜ਼ ਸੱਚ ਠੂੜਨਾ ਸਬਰ ਵਾਇੰਦੀ ਗੱਲ ਜੇ ਕੰਪਰੋਮਾਈਜ਼ ਕਰ ਲਵੇ ਸੱਚ ਸੱਚ ਰਹਿੰਦਾ ਰਹਿੰਦਾ ਸੱਚ ਪਤਾ ਚਾਹੀਏ ਉਹ ਲੋ ਜਵਲ ਕੇ ਫਿਰ ਬਾਜੀ ਜਿੱਤੀ ਹਰ ਗਿਆ ਜਿੱਤੀ ਬਾਜੀ ਹਰ ਗਿਆ ਹਾਂਜੀ ਸੋਦਤ ਸੋਦਤ ਸੋਦਤ ਸਿੱਜਿਆ ਗੁਰਪ੍ਰਸਾਦ ਤਤ ਸਭ ਬੁੱਝਿਆ ਸੋਦਤ ਸੋਦਤ ਸੋਦਤ ਸਿੱਜਿਆ ਦੇਖੋ ਕਿੱਥੇ ਆ ਗਿਆ ਫਬਰ ਦੇ ਆ ਕਿੱਥੇ ਗਏ ਇਹ ਆਪ ਆਪਣੇ ਇਹਦਾ ਬਣਾ ਇਹ ਨਹੀਂ ਬਣਾਉਣਾ ਇਹ ਨਹੀਂ ਵਾਣਾ ਹਕੂਲ ਕਰਨਾ ਇਹਦਾ ਇੱਦਾਂ ਚਾਹ ਕੋਣ ਜੋ ਕੁ ਗਲਦਾਈ ਹੋਈ ਆ ਕੱਲੋ ਸਾਰੀ ਇਹ ਤਾਂ ਖੜ ਗਿਆ ਆ ਬਈ ਹਰ ਹੈ ਆ ਗਿਆ ਜੂ ਹਰ ਆਹ ਹੋਰ ਪ੍ਰਸਾਦ ਤੱਕ ਸਭ ਭੁਜਿਆ ਹੋਰ ਹਰ ਕੌਣ ਕੀ ਹੈ ਅਗਲੇ ਅਸਥਰੀ ਕੇ ਹੀ ਦਲੇਗਾ ਹਰ ਵਾਰੇ ਹਾਂ ਜਦ ਦੇਖੂ ਤਬ ਸਭ ਕੁਝ ਮੂਲ ਨਾਨਕ ਸੋ ਸੁਖਮ ਸੋ ਹੀ ਜਦ ਦੇ ਕੁੱਤਾ ਸਭ ਕੁਝ ਚਾ ਦੇਖਿਆ ਸਭ ਕੁਝ ਉਹਦਾ ਕੋਈ ਯਾਦ ਉਹਦਾ ਹੇਦੀ ਮਾਇਆ ਦਾ ਜੀ ਨਹੀਂ ਫਿਰ ਮਾਇਆ ਦਾ ਮੁਕਤ ਉਹਦੇ ਵਿੱਚ ਇੱਥੇ ਮਾਇਆ ਉਹ ਨਹੀਂ ਨਾ ਉੱਥੇ ਉਹ ਦੀ ਮਾਇਆ ਦੀ ਆ ਸਭ ਸਾਥ ਦੀ ਹੀ ਤੇ ਜਿਹੜੀ ਦਰਗਾੜੀ ਆਖੋ ਉਹਦੇ ਨਾ ਉਹ ਦੀ ਜਦ ਬਲ ਕੋ ਤਾਂ ਸਭ ਹੀ ਨੂੰ ਇਹ ਇਸ ਕਰਕੇ ਜਾਂ ਦੇਖਿਆ ਤਾਂ ਕੋਈ ਮਗਲ ਜੋ ਧੀਨਾ ਕੋਈ ਨਹੀਂ ਦਾ ਸਮਾਦ ਲਗਾਏਗਾ ਮਾਇਆ ਨਹੀਂ ਦੀ ਮਾਇਆ ਵੀ ਉਹਦੇ ਵਿੱਚੋਂ ਨਹੀਂ ਮਾਇਆ ਵੀ ਉਹਦੇ ਵਿੱਚੋਂ ਹੀ ਕਰਦੀ ਹੋਊਗੀ ਮਾਇਆ ਵੀ ਉਹਦੇ ਵਿੱਚੋਂ ਹੀ ਹੋਊਗੀ ਮਾਇਆ ਬ੍ਰਹਮ ਰਵਾ ਮਾਇਆ ਦੇ ਵਿੱਚ ਹੀ ਗੋਬਦਾ ਗਤੇ ਕਿਥੇ ਰੱਖੀਆ ਕਿਥੇ ਨਹੀਂ ਰੱਖੀ ਕਿ ਮੈਂ ਰੱਖੀ ਹੋ ਜਾ ਅੱਤੋਂ ਗੱਡ ਕੇ ਜਾਂਦਾ ਮਾਇਆ ਆਪਣਾ ਤੇ ਮੂਲ ਤਾਂ ਵੇਰਵਾ ਹੋਇਆ ਮੂਲ ਤਾਂ ਫਿਰ ਉਹੀ ਹੋਇਆ ਸੇੜੇ ਮੂਲ ਹੋਇਆ ਜੇ ਫਲ ਤੋਂ ਮਿਲਦਾ ਸੇੜੇ ਮੂਲ ਆਹ ਨਾਲ ਕੋਸ ਕੋਕੋ ਸੋਇਆ ਸੂਰ ਆਹ ਕਹਿੰਦਾ ਸੋਸੂਗੋ ਮੋਇਆ ਸੂਰ ਅਜ਼ੂਰ ਅਜ਼ੂਕ ਵਿੱਚ ਕੋਈ ਜਗ੍ਹਾ ਨਹੀਂ ਹੁਣ ਇਕੱਠੀ ਨਾ ਆਇਆ ਬ੍ਰਹਮ ਬ੍ਰਹਮਾ ਸਰਤ ਪਰ ਉਹਦੇ ਅੰਦਰ ਮਾਇਆ ਬਾਹਰ ਦੀ ਦੀਦੀ ਸਾਡੇ ਬਾਹਰ ਆਇਆ ਉੱਥੇ ਮਾਇਆ ਗੁਪਤ ਹੈ ਇੱਥੇ ਮਾਇਆ ਪ੍ਰਗਟ ਹੈ ਉੱਥੇ ਉਹ ਪ੍ਰਗਟ ਹੈ ਮਾਇਆ ਗੁਪਤ ਹੈ ਇੱਥੇ ਮਾਇਆ ਪ੍ਰਗਟ ਹੈ ਉਹ ਇਸ ਕਰਕੇ ਇੱਥੇ ਮਾਇਆ ਪ੍ਰਗਟਾ ਮੂਰਤੀ ਪੂਜਾ ਹੋਗੀ ਉਹ ਤਾਂ ਨਾਕਾਰ ਪਰ ਤਾਂ ਹੈ ਸੱਚਖੰਡ ਵਸੇ ਨਰਨ ਦਾ ਉਹ ਤਾਂ ਨਾਕਾਰ ਪਰ ਤਾਂ ਮੂਰਤੀ ਦੇਖਣੀ ਹੈ ਮੂਰਤੀ ਉਹਦੀ ਹੋਦੀ ਮਾਇਆ ਉਸੇ ਜੇ ਹੈ ਤਾਂ ਉਹਦਾ ਰੂਪ ਹੋ ਰਿਹਾ